ਸ਼ਲੋਕ ਮਹੱਲਾ 5 ਕੜਛੀਆਂ ਫਿਰਨ ਸੁਆਉ ਨਾ ਜਾਣੈ ਸੁਝੀਆਂ ਸਈ ਸੁਖ ਬਿਸਨ ਨਾਨਕ ਰੱਤੇ ਪ੍ਰੇਮ ਰਸ ਕੜਛੀ ਹੁੰਦੀ ਹੈ ਜੱਗ ਕੇ ਜਾਏ ਲੋਣ ਵਾਲੇ ਚ ਪਾਵੇ ਚਾਹ ਬਿਠੇ ਵਾਲੇ ਚ ਪਾਵੇ ਉਹਦੇ ਕਿਹੜੇ ਵੀ ਮਨੂੰ ਲੋਣ ਵਾਲੇ ਚ ਕਿਉਂ ਪਾਤਾ ਬਿਠੇ ਵਾਲੇ ਚ ਕਿਉਂ ਪਾਉ ਉਹ ਤੀਸਰੀ ਕੜਛੀਆਂ ਸੁਆ ਲਈ ਦੱਸਦੀਆਂ ਉਹਨਾਂ ਦਾ ਆਪਣਾ ਕੋਈ ਸਵਾਲ ਸੌ ਦੀ ਹੁੰਦਾ। ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅੱਛਾ। ਕੁਝ ਜ਼ੰਮਤ ਇਹ ਜਿਹੀ ਵੀ ਆ ਕੜਚੀਆਂ ਵਰਗੀ ਗੁਰੂ ਕੋਲ ਚਲੀ ਜਾਵੇ। ਚਾਹ ਆਮ ਆਦਮੀ ਚਲੀ ਜਾਵੇ ਚਾਹ ਕਿਤੇ ਗਈ ਜਾਵੇ ਉਹ ਕੜਚੀ ਹੁੰਦਾ ਲੋ। ਅੱਛਾ। ਉਹ ਪਤਾ ਨਹੀਂ। ਠੀਕ ਹੈ ਜੀ। ਅੰਦਰ ਸੀ। ਨਾ ਜਾਣਨ ਸੁਣੀਆਂ ਜਾਣਾ ਸੁਣਿਆ ਰਹਨੇ ਵੀ ਬਾਤ ਦਿਖਾਦੀ ਤੇ ਅਰਜੀ ਕੋਈ ਭਰੇ ਨਹੀਂ ਰਹਿੰਦਾ ਅੱਛਾ ਜੀ ਇਹ ਜੋ ਖਾਲੀ ਸਾਰੇ ਮਾਰਦਾ ਪੁੱਠੀ ਕਰਕੇ ਇਹਦੇ ਖਾਲੀ ਇਹੀ ਰਤੇ ਪ੍ਰੇਮ ਰਾਸ ਸਹੀ ਮੁਖ ਅੰਦਰ ਪ੍ਰੇਮ ਰਾਸ ਹੈ ਨਾ ਪ੍ਰੇਮ ਗੁਰੂ ਰਾਸ ਮੁਖ ਦਿਸਦੇ ਨੇ ਭਈ ਇਹਾਂ ਦੇ ਅੰਦਰ ਕੋਈ ਟੇਸ ਆਇਆ ਹੋਇਆ ਅਰ ਜਿਆਦਾ ਇਹ ਹੋਈਆਂ ਬੁਰੀਆਂ ਲਗੀਆਂ ਨਾ ਸਗੋਂ ਬੜੀਆਂ ਹੋਈਆਂ ਜਿਆਦਾ ਦਾ ਜਿਆਦਾ ਜੇ ਮੁੱਖੀਆਂ ਬੈ ਮੱਖੀ ਵੀ ਬੈਠੂਗੀ ਤਾਂ ਗੰਦੀ ਮੱਖੀ ਬੈਠੂਗੀ ਸ਼ਹਿਰ ਵਾਲੀ ਮੱਖੀ ਉਹ ਤੇ ਮੱਖੀ ਮੱਖੀ ਉਹ ਕਦੀ ਦੀਵੇ ਦੀ ਮੱਖੀ ਬੈਠੂਗੀ ਜੋ ਕੋ ਜੋ ਲੈ ਗਿਆ ਉਹਦੇ ਨੂੰ ਲੱਗਿਆ ਟੇਸ ਆ ਉਹਦੇ ਮਤਲਬ ਵਧਾਈ ਆ ਠੀਕ ਹੈ ਦੂਜੀ ਮੱਖੀ ਦਾ ਮਤਲਬ ਦਾ ਕੜਕੀਆਂ ਦਾ ਇਹ ਹਾਲ ਮੁਖ ਦਾ ਭਾਵ ਹੈ ਇੱਥੇ ਅੰਦਰਲਾ ਮੁਖ ਉਹ ਗਾਜੀ ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਦੇ ਮੁਖ ਸੱਚਖੰਡ ਤੇ ਸੱਚਖੰਡ ਦੀ ਗੱਲ ਹੈ ਕੈਮਰੇ ਨੂੰ ਨਹੀਂ ਨਾ ਮੁਖ ਤਾਂ ਤਾਂ ਤੀਜੀ ਅੱਖ ਨਾਲ ਮੁਖ ਇਹ ਤਾਂ ਬਖੌਤੇ ਠੀਕ ਹੈ ਜੀ ਬੁਖਾਰ ਤੇ ਆਨ ਬੁਖ ਕਹਿਣ ਲੱਗੇ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਵਾੜ ਨਾਨਕ ਖੇਤ ਨਾ ਛਿਜੈ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਖੋਜੀ ਖੋਜ ਲੱਭਦੇ ਜੇ ਜਾਂ ਉਜੜ ਜਾਂਦਾ ਉਹ ਹੋ ਜਾਂਦਾ ਦਿਆਂ ਬਾਦ ਜੰਗਲੇ ਹੋ ਜਾਂਦਾ ਨਾ ਫਿਰ ਕੋਠੀ ਖੋਈ ਅਦਰੋ ਰੋਈ ਚਲੇ ਗਏ ਛੱਡੀਆਂ ਉਜਾੜ ਇਹਦੀ ਖੋਜ ਲੱਭਦੇ ਸੀ ਕਿਹਨੇ ਉਹ ਯਾਰ ਦੁੱਤਾ ਸੱਚ ਦਾ ਬਾਗ ਉਜਾੜਿਆ ਉਹਨਾਂ ਨੂੰ ਲੱਗਦੇ ਦੇ ਉਜੜਿਆ ਕਿਉਂ ਇਹ ਉਜੜਣ ਦੇ ਕਾਰਨ ਲੱਭਦੇ ਦੇ ਸਿੱਕੀ ਉਜੜ ਕਿਉਂ ਗਿਆ ਬਾਗ ਸਿੱਕਿਆ ਗਿਆ ਕਿਥੇ ਕੋਈ ਇੱਕ ਗਲਤੀ ਹੋਣੀ ਚਾਹੀਦੀ ਸੀ ਕਦੋਂ ਅਸੀਂ ਰਾਹ ਛੱਡਤਾ ਕਿਹੜੇ ਰਾਹ ਪੈ ਗਏ ਕਿਹਨੇ ਪਾਸ ਤੇ ਪਿੱਛੇ ਤੇ ਖੋਜੀ ਲੱਭਦੇ ਨੇ ਉਜਾੜਨ ਵਾਲੇ ਪਕੜੇ ਤਕੜਚਾ ਗਏ ਜਿਨ੍ਹਾਂ ਨੇ ਉਜਾੜੇ ਤੇ ਉਹ ਉਹਦੀ ਖੋਜ ਫੜ ਕੇ ਉੱਥੇ ਪਹੁੰਚ ਗਏ ਅਦ ਸਲੋਗਨ ਲਾਤਾ ਨੇ ਵਿਰੋਧ ਕੀਤਾ ਸੀ ਰਾਜ ਨੂੰ ਚਾਹੂ ਕੁਤ ਨੂੰ ਉਹ ਸੀ ਬੁੱਢਾ ਸਭ ਤੋਂ ਪਹਿਲਾਂ ਜਿਹਨੇ ਰਾਜ ਕਲਪ ਕੀਤਾ ਸਭ ਤੋਂ ਪਹਿਲਾਂ ਉਹ ਸੀ ਆ ਉਹਦੇ ਨਾਲ ਟੋਲਣਾ ਸੀ ਰਲਿਆ ਹੋਇਆ ਇਹਨਾਂ ਦਾ ਭਾਈ ਉਹਦਾ ਵਾਇਟਾਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਸੀਗਾ ਸਭ ਤੋਂ ਪਹਿਲਾਂ ਤਾਂ ਰਾਮ ਰਹੇ ਸੀ ਜਿਹੜੇ ਰੇਂਦੇ ਜਿਹੜਾ ਦੂਮ ਸੀ ਕੇ ਸਾਰੇ ਉਜਾੜਨ ਵਾਲੇ ਇਹ ਉਜਾੜੇ ਦਾ ਕਰਦੇ ਸਾਰੇ ਇਹ ਹੀ ਹੁਣ ਬੜੇ ਬੱਠੇ ਨੇ ਹੁਣ ਵੀ ਇਹਨਾਂ ਦੇ ਉੱਪਰ ਯਾਰ ਹੋ ਰਹੇ ਹੈ ਕਿ ਕੋ ਕਹਿੰਦਾ ਕਿ ਆਈਆਂ ਨਾ ਉਧਰ ਵੋਟਾਂ ਦੀ ਵੋਟਾਂ ਇਹਨਾਂ ਦੀ ਹੈਗੀਆਂ ਵੋਟਾਂ ਨਾਲ ਸਰੋਮਣੀ ਕਮੇਟੀ ਬਣਾਉਣੀ ਤੇ ਉਹਦੇ ਅੰਦਰ ਪ੍ਰਚਾਰ ਦੇਣਾ ਸਭ ਤੋਂ ਖਤਰਨਾਕ ਗੱਲ ਸੀ ਸਿੱਖੀ ਵਾਸਤੇ ਇਹ ਵੋਟਾਂ ਨਹੀਂ ਆਉਂਦੀਆਂ ਜਿਆਦਾ ਠੀਕ ਹੈ ਸਾਹਿਬ ਜੀ ਵੋਟੇ ਘੱਟ ਸੀ ਕਿਉਂ ਸਿੱਖੀ ਦਾ ਪ੍ਰਚਾਰ ਹੋਊਗਾ ਜਦ ਵਿਰੋਧੀਆਂ ਨੇ ਵੋਟਾਂ ਜਿਆਦਾ ਤੋਂ ਇਹਦਾ ਬਿਲਦੇ ਨੇ ਨਾਲ ਹੀ ਜਿਨ੍ਹਾਂ ਨੂੰ ਲੋੜ ਆਉਦਾ ਫਿਰ ਲੈਣ ਦੀ ਨਹੀਂ ਤੁਸੀਂ ਰਾਜ ਬੇੜਾ ਤਾਂ ਕਰ ਘੋੜਾ ਹੀ ਪਰ ਪ੍ਰਚਾਰ ਹੀ ਨਹੀਂ ਹੋ ਸਕਦਾ ਕਦੇ ਵੀ ਪ੍ਰਚਾਰ ਹੋ ਆਪਣਾ ਤੁਸੀਂ ਆਪਣਾ ਗੋਲਕਾਰ ਆ ਵੋਟਾਂ ਗੁਰਦੁਆਰੇ ਰੱਖੋ ਗੁਰਦੁਆਰੇ ਤੋਂ ਸਾਈਡ ਤੋਂ ਪ੍ਰਚਾਰ ਸ਼ੁਰੂ ਹੋ ਹਾਂਜੀ ਤੈਸੇ ਦਿੱਤੀ ਵਾਰਡ ਨਾਨਕ ਖੇਤ ਨਾ ਛਿੱਜਈ ਵਾਰਡ ਹੀ ਨਾ ਦਿੱਤੀ ਹੈ ਉਹਨੇ ਆਪ ਅੱਗਰ ਤੀਣਾ ਵਾਰਡ ਸੱਚ ਦੀ ਅੰਦਵਾਰਾ ਕਰਤਾ ਨਾ ਅਰਥ ਇਹ ਹਾਂ ਤੇ ਵਾਰਡ ਇਹ ਕੀਤੀ ਐ ਦਵਾਰ ਆਈ ਕਿਥੋਂ ਤਾਰ ਕਿਥੋਂ ਆਈ ਐ ਸੱਜੜ ਤੋਂ ਆਈ ਐ ਤਾਰ ਕਿਥੋਂ ਆਈ ਐ ਸੱਜੜ ਤੋਂ ਖੁੰਦੇ ਵੀ ਬਹੁਤ ਮਜ਼ਬੂਤ ਨੇ ਤਾਰ ਸਾਹਿਬ ਤੀ ਵਾਰਡ ਯਾ ਨਾ ਯਾਰੇ ਹਾਂਜੀ ਸਭ ਤੋਂ ਬੜੀ ਤੱਬ ਤੋਂ ਤਰ੍ਹਾਂ ਜਾਣਗੇ ਪਏ ਸਾਰੇ ਬਾਹ ਫੇ ਠੀਕ ਹੈ ਜੀ ਕੁੱਟਾਂ ਨੇ ਵੀ ਸਿਰੇ ਬਾਹਨੇ ਨੇ ਕਦੂਏ ਦੇ ਹੋਰ ਕੀ ਕਰਦੇ ਨੇ ਕੁੱਟਾਂ ਨੇ ਪਾਸੇ ਰੋ ਤੁਸੀਂ ਰਾਜ ਕਰੋ ਠੀਕ ਹੈ ਰਾਜੇ ਕਦੂਏ ਦੇ ਸਿਰ 파ਂਡਦੇ ਤੇ ਗਲਵੱਟ ਤੇ ਰਾਜ ਖੂਦੇ ਦਾ ਚੱਲਦਾ ਹੀ ਜਾਂਦਾ ਰੂਪੀ ਖੇਤ ਦੀ ਗੱਲ ਹੋ ਰਹੀ ਆ ਇਹਦੇ ਰੂਪ ਕੀ ਦੀ ਗੱਲ ਨਹੀਂ ਹੋ ਰਹੀ। ਸੱਚ ਦੀ ਗੱਲ ਹੋ ਰਹੀ ਹੈ। ਕਿ ਕਿ ਸੱਚ ਦਾ ਪ੍ਰਚਾਰ ਹੁੰਦਾ ਹੈ। ਹਾਂਜੀ। ਸੱਚ ਦੇ ਪ੍ਰਚਾਰ ਦੀ ਵਾਰ ਕਰਕੇ ਸਾਰੇ ਖਬਰ ਤੋੜ ਕੇ ਵਾਰ ਨੂੰ ਥੋੜਾ ਸਾਰਾ। ਇਹ ਪ੍ਰਚਾਰ ਜਿਹੜਾ ਬਦਲਿਆ ਲਫ਼ਜ਼ਾਂ ਦੇ ਅਰਥ ਬਦਲੇ ਨੇ ਇਹ ਤਾਂ ਵਾਰ ਖਤਮ ਕੀਤੀ ਆ। ਪ੍ਰਚਾਰ ਫੇਰ ਉਹ ਅਰਥ ਲੈ ਆਉਂਦੇ। ਇਹ ਦੁਆਰਾ ਫੇੜ ਬਾੜ ਕਰਤੀ ਠੀਕ ਹੈ ਜੀ ਤੇ ਆ ਬਾੜ ਆ ਏਰੀਆ ਆ ਬਾੜੀ ਐ ਬਾੜੀ ਜਿਆਣੀ ਜਾਨੀ ਦੇ ਰਾਜਾ ਰਾਮ ਕੀ ਕਹਾਣੀ ਦੇ ਬਾੜ ਦੇ ਅੰਦਰ ਅੰਦਰ ਰਹੂਗੀ ਸੁਣਨੀ ਆ ਇਹ ਫੇਰੀਏ ਚਾਜ ਜੋਤ ਬਰਦਸਾਹ ਕੇ ਗੁਰਮਖ ਬੰਲੇ ਜਲਦੀ ਉਹ ਬੰਲੇ ਗੁਰਮਖਾਂ ਕੋਲ ਜਿਵੇਂ ਲੱਗੇ ਜਾਂਦੇ ਰਹੇ ਤੇ ਹੋ ਕੇ ਦੁਬਾਰਾ ਫੇਰ ਜਾਲ ਲੈਣ ਗਈ ਲੋ ਜਾਨਾ ਉਹ ਵਾੜੇ ਸੱਚ ਕੀ ਹੈ ਅੱਛਾ ਜੀ ਢੂੜ ਕੀ ਹੈ ਜਿੰਨਾ ਚਿਰ ਇਹਦਾ ਲੈ ਨਹੀਂ ਸਾਰੇ ਰੱਦ ਕਰਤੇ ਫੈਸਲਾ ਇਹ ਨਹੀਂ ਹੋ ਸਕਿਆ 300 ਸਾਲ ਸਾਥੇ ਗੱਲਾਂ ਦਾ ਵਾੜ ਕੋਈ ਥੀੜੀ ਤੇਤ ਕੌਣ ਹੈ ਖੇਤ ਨਾ ਛਿਜੇ ਵਾੜ ਤਾਂ ਅਪਰਿਵਰਦ ਹੋ ਗਈ ਹੈ ਪਰ ਮੈਨੂੰ ਕਿੱਥੋਂ ਮੈਨੂੰ ਤਾਂ ਉਹਦਾ ਪਬਲਿਕ ਨਹੀਂ ਹਾਂਜੀ ਉਹ ਭਗਤ ਪਬਲਿਕ ਦੇ ਵਿੱਚ ਕੀ ਹੋਏ ਨੇ ਹਾਂਜੀ ਹਾਂ ਭਗਤਾਂ ਨੇ ਬਾੜੇ ਦਿੱਤੀ ਬਾੜੇ ਦਿੱਤੀ ਹੈ ਸਾਰਿਆਂ ਨੂੰ ਗੁਰੂਆਂ ਨੇ ਬਾੜੇ ਦਿੱਤੀ ਹੈ ਸਾਰਿਆਂ ਨੂੰ ਸਤ ਸੰਤੋਖ ਬੁੱਢੀ ਕਾਸ ਨੂੰ ਹੈ ਇਹਨਾਂ ਲੋੜ ਉਹ ਗਰਦਾਰ ਦਾ ਫਰੀ ਦੇ ਰਹੀ ਐ ਬਾੜ ਕਣਿਆਲੀ ਧਾਰ ਵੀ ਦੇ ਰਹੀ ਐ ਖੰਮੇ ਵੀ ਦੇ ਰਹੀ ਐ ਸਭ ਨੂੰ ਫਰੀ ਦੇ ਰਹੀ ਐ ਜਿਹੜਾ ਖੇਦ ਰਖਣਾ ਆਪਣਾ ਬਚਾਉਣਾ ਬਾੜ ਹੈ ਠੀਕ ਹੈ ਜੀ ਹਾਂ ਕੌਡੀ ਆਰਾਧੇ ਸੱਚਾ ਸੋਏ ਕਭ ਕਿਸ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਕਿਨ ਮੈਂ ਕਰੇ ਰਾਸ ਆਰਾਧਨਾ ਨੇ ਕਰਨੀ ਆ ਉਹਦੀ ਕਰਿਓ ਜਿਹਦੇ ਕੋਲ ਸਭ ਕੁਝ ਹੈ ਸਭ ਸੱਚਾ ਦੁਨੀਆ ਰਾਜਾ ਕਰ ਲਿਓ ਕਤੇ ਹੋਰ ਕਿਛੇ ਦੀ ਬਹੁਤ ਸਰੇ ਆਕਾ ਖਸਮ ਥੋਣ ਸਰੇ ਆਕਾ ਖਸਮ ਦੋ ਸਰੇ ਕੀਨੇ ਜੰਮਣ ਪਾ ਲੋਕ ਬਲੋਕ ਠੀਕ ਹੈ ਐਸ ਲੋਕ ਵੀ ਖਸਮ ਹੋਇਆ ਖਸਮ ਹੋਇਆ ਦੋ ਕਰੇ ਰਾਸ ਆਪ ਹਾਂਜੀ ਕਿਨਾਂ ਮੇ ਰਾਸ ਕਿਹਨੇ ਮੇ ਰਾਸ ਕੰਮ ਵਿਗੜਿਆ ਹੋਇਆ ਨਾ ਹਾਂਜੀ ਮਾਇਕ ਭੂਖ ਮਾਣ ਨੇ ਦੇਰਾ ਗੋਦ ਕੀ ਓਟ ਗਹੋ ਪਉ ਤੇ ਤੇ ਕੁੰਡਣੀ ਆਲੇ ਵੀ ਰੋਜ ਆਉਂਦੇ ਨੇ ਕਿਥੀ ਉਹ ਵੀ ਬਹੁਤ ਬਹੁਤ ਆਸਦੇ ਨੇ ਇਹ ਤਿਆਗ ਤੋਂ ਛੱਡ ਸਾਰੇ ਉਪਾਅ ਇਹ ਮੇਰੀ ਲੋੜ ਰਹੀ ਹੈ ਹੋ ਜੇ ਬਚਣਾ ਸੰਸਾਰ ਚੋਂ ਠੀਕ ਹੈ ਤੇ ਕੁਝ ਖਟਕੇ ਜਾਣਾ ਤਿਆਗ ਦੋ ਇਹਨਾਂ ਨੂੰ ਸੁਣਨਾ ਛੱਡ ਦੋ ਬੰਦ ਕਰ ਦੋ ਟੈਲੀਵਿਜ਼ਨ ਵਾਲਿਆਂ ਨੂੰ ਕੈ ਤੋਂ सगलो ਪਾਪ ਤਿਸ ਕੀ ਓਟ ਦੋ ਉਹਦੀ ਓਟ ਲੈ ਲਓ ਕੁਛ ਦੀ ਤੁਹਾਡਾ ਕੀ ਬਗਾਨ ਸਕਦੇ ਵੀ ਕਿਹੜੇ ਬਾਗ ਦੀ ਗੁੜੀ ਨੇ ਸਾਰੇ ਤੂਰੇ ਠੀਕ ਹੈ ਜੀ ਪੱਥਰ ਨੇ ਉਹਦਾ ਕੀ ਬਗਾਨ ਦੇਣਗੇ ਇਹ ਹੁਕਮ ਕਰ ਸਕਦੇ ਨੇ ਉਹ ਜੜ ਕੀ ਜਾਣੀ ਇਹ ਤਾਂ ਤਾਂ ਕੋ ਨਾ ਕੋ ਅਸਰ ਪਾਸ ਨਹੀਂ ਦੀਓ ਇਹ ਤਾਂ ਇਹਨਾਂ ਦੇ ਡਰੇ ਹੋਏ ਦੇ ਲੋਕ ਹੈ ਭਾਈ ਡੁੱਟਣ ਵਾਸਤੇ ਪਉ ਸ਼ਰਨ ਆਈ ਭਜ ਸੁਖੀ ਹੋ ਸੁਖ ਲਲੋ ਉਹ ਸ਼ਰਨ ਪੈ ਜਾਓ ਚੱਕ ਦੀ ਕੁਰਬਾਨੀ ਦੀ ਸ਼ਰਨ ਪੈ ਜਾਓ ਕੁਰਬਾਨੀ ਤੇ ਲਲ ਲੱਗ ਜਾਓ ਪਰ ਸੁੱਖੇ ਸੁਖ ਦੇ ਅਰ ਸੁਖ ਸੁਖ ਲਾਓ ਸੁੱਖੇ ਸੁਖ ਲਈ ਜਾ ਤੂੰ ਦੁਖਈ ਰਹੀ ਤੇ ਕਾ ਭਲਾ ਉਹ ਦੇ ਦੇ ਉਹ ਕਦੇ ਕਿਸੇ ਦੇ ਬਿਲ ਦੋ ਮਹੀਨੇ ਪਹਿਲੂ ਹੋ ਗਿਆ ਕਦੇ ਕਿਸੇ ਤੇ ਪੈਸੇ ਦੇ ਕੇ ਬਿਆਨ ਉਹਨਾਂ ਦੇ ਰਿਸ਼ਤੇਦਾਰੇ ਨੇ ਠੀਕ ਹੈ ਜੀ ਰਿਸ਼ਤੇਦਾਰ ਬਿਆਨ ਹੋਈ ਜਾਂਦਾ ਹੈ ਹਾਂ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜੱਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੇ ਕੋਈ ਕਰਵਾ ਧਰਮ ਔਰ ਤਤ ਗਿਆਨ ਜੁਥਾ ਸੁਖ ਹੋਏ ਸੰਤਾਂ ਦੇ ਨਾਲ ਰਹਿੰਦੇ ਕਰੋ ਧਰਮ ਤਤ ਗਿਆਨ ਉਹ ਇਹ ਚੀਜ਼ਾਂ ਰੱਖਦੇ ਨੇ ਕੋਈ ਅੱਛਾ ਜੀ ਸਤ ਤਾ ਇਹ ਆਪੇ ਅੱਛਾ ਜੀ ਸਤ ਤਾ ਗਿਆਤਰ ਉਹਦਾ ਗਿਆਨ ਹੈ ਸਤ ਗਿਆਨ ਸਤ ਨਾਲ ਹੀ ਰਹਿੰਦਾ ਸਤ ਨਾਲ ਹੀ ਰਹਿੰਦੇ ਇਹਦੇ ਕੋਈ ਉਹ ਪਰਤ ਕੀ ਹੈ ਖੁਦ੍ਰਿਤ ਐਸਾ ਜੀਵ ਜਿਹੜਾ ਜਿਹੜਾ ਮਰਦਾ ਹੀ ਨਹੀਂ ਜਿਹੜਾ ਪ੍ਰਾਣ ਹੀ ਨਹੀਂ ਦੇਖੋ ਅੱਛਾ ਜੀ ਯਾਰਾਂ ਜੁੱਭਾ ਇੱਕੋ ਜਿਹਾ ਹੀ ਹੈ ਜਾਨੋ ਬਦਲਦਾ ਹੀ ਨਹੀਂ ਪੁਰਾਣਾ ਹੀ ਰਹਿੰਦਾ ਜੇ ਕੋਈ ਨਹੀਂ ਵਰਦੀ ਫਿਰ ਕੋਈ ਰਸਤੇ 'ਚ ਕੋਈ ਰੁਕਾਵਟ ਨਹੀਂ ਹੁੰਦੀ ਸੱਚ ਖੜ੍ਹਤ ਨਹੀਂ ਕੋਈ ਬੁਲਾਇਆ ਨਹੀਂ ਠਕਦਾ ਉਹ ਜਿਹੜਾ ਤੁਰੇ ਫਿਰੇ ਜਿੱਧਰ ਮਰਜੀ ਚਾਲਾਂ ਕੋਟਾਂ ਖੁੱਲੀਆਂ ਨੇ ਠੀਕ ਹੈ ਆਪ ਦਇਆਲ ਮਨ ਉੱਠਿਆ ਪਾਇਨ ਸਬਨਿਧਾਨ ਸਾਹਿਬ ਟੁੱਟਿਆ ਜਿਸੁ ਰੂਪ ਆਪਦੇ ਆ ਜਿਹਦੇ ਤੇ ਆਪਦੇ ਆ ਲੋਜੇਵੇ ਜਿਸ ਮਨ ਬੁਠਿਆ ਤੇ ਦਰਪਾ ਕਰ ਦਿੰਦਾ ਉਹਦੇ ਮਨ ਦੇ ਵਿੱਚੇ ਹੀ ਸ਼ਬਦ ਗੁਰੂ ਪ੍ਰਗਟ ਕਰ ਦਿੰਦਾ ਸੋਚੀ ਦੇ ਦਿੰਦਾ ਬੁਠਿਆ ਸੋਚੀ ਦੇਣੀ ਦੇਣੀ ਆ ਮਨ ਨੂੰ ਜਗਾ ਦਿੰਦਾ ਕੋਈ ਜਾਗ ਪੈਂਦਾ ਹਾਂਜੀ ਪਾਇਨ ਸਬਨਿਧਾਨ ਸਾਹਿਬ ਟੁੱਟਿਆ ਪਾਇਆ ਸਬਨਿਧਾਨ ਸਾਹਿਬ ਟੁੱਟਿਆ ਸਾਹਿਬ ਤੋ ਟਪੈ ਸਾਰੇ ਖਿਆਲ ਜੂ ਜਾਂਦੇ ਨੇ ਸਾਰੇ ਖਿਆਲ ਨੇ ਆਪਣੇ ਹੀ ਨੇ ਭਗਾਨੇ ਜਿਹਦੇ ਉਹ ਭਗਾਨੇ ਨੇ ਜਿਹੜੇ ਤਨਖਾਹ ਲੈਦੇ ਨੇ ਬੋਲ ਜਿਹੜੇ ਸਾਹਿਬ ਨੇ ਕਮਾਲ ਜੇ ਤੂੰ ਕਰਿਆ ਹੋ ਰਹੇ ਤੇਰਾ ਹੋਏ ਇਹ ਲੋਕਾਂ ਨੂੰ ਕਿ ਤਨਖਾਹੀਏ ਕਹੀ ਜਾਂ ਨਾ ਤੁਰੇ ਪੁੱਛਿਆ ਤਨਖਾਹੀਏ ਹੁੰਦਾ ਕੌਣ ਨੇ ਪਤਾ ਵੀ ਅਸਤ ਤਨਖਾਹ ਗੋਣੇ ਤੂੰ ਹੀ ਲੈਣੋ ਤਨਖਾਹੀਏ ਲੋਕਰ ਮੈਨੂੰ ਇਹਲੇ ਤਰਖਾ ਲੈੰਦੇ ਨੇ ਸਿੱਖ ਨਹੀਂ ਆਣੋ ਦਿਖਾਇਆ ਰਾਇ ਕੀਤਾ ਹੈ ਗਦੰ ਪਾਸ਼ਾ ਦਾ ਸਾਹ ਗੁਰੂ ਘਰ ਤੋਂ ਤਰਖਾ ਲੈਣ ਵਾਲਾ ਸਿੱਖ ਨਹੀਂ ਹੈ ਉਹ ਜੋ ਆਪ ਕਹਿ ਤੋ ਸਹੀ ਅੱਛਾ ਤਰਖਾਈ ਆ ਵੀ ਸਿਖੋ ਤਰਖਾਈ ਆ ਤਾਈਆਂ ਸਿੱਖੇ ਦੀ ਤਰਖਾਈ ਆ ਲੈ ਗੁਰੂ ਘਰ ਤੋਂ ਤਰਖਾ ਲੈਣ ਵਾਲਾ ਸਿੱਖ ਨਹੀਂ ਹੈ ਤਰਖਾਈ ਸਿੱਖ ਹੋ ਸਕਦਾ ਤਰਖਾਈ ਉਹਨੂੰ ਵਹਿਣ ਨਹੀਂ ਤੇ ਕੋਈ ਵਗਿਆ ਹੋਗੀ ਗਲਤੀ ਹੋਗੀ ਕਬਾਬ ਚਰ ਗਿਆ ਪਛਾਇਰਾ ਵਿੱਚ ਚਰ ਗਿਆ ਅਗਿਆ ਹੋ ਗਈ ਉਹ ਪੰਜ ਪਿਆਰੇ ਇਕੱਠੇ ਕਰ ਲੈ ਬੇਤੇ ਆ ਵਗਿਆ ਹੋ ਗਈ ਤੇ ਤੂੰ ਬਖਤੋ ਮੈਂ ਜਾਣ ਕੇ ਨਹੀਂ ਕੀਤੀ ਤੇ ਤੇ ਆ ਕੋਲ ਹੋ ਉਹ ਦੇਖ ਲੱਗਦਾ ਨਾ ਵੀ ਕੋਲ ਹੋਈ ਆ ਗਜੜ ਕੇ ਜਾਣ ਕੇ ਕੀਤੀ ਫਿਰ ਤਾਂ ਬਖੀ ਦੇਦੀ ਵਾਰ ਬਖੀਏ ਤੇ ਵਾਰ ਫੇਰ ਆ ਜਵੇ ਛੱਡੋ ਜੇ ਉਰਦੇ ਤੇ ਉਦੀ ਤੂੰ ਬਾਹਰੇ ਲੈ ਇਹਦੇ ਉਜਨਾਵਾਂ ਕਰਦੇ ਨਾ ਸਿੱਖੀ ਚ ਰੱਖਦਾ ਠੀਕ ਹੈ ਸਿੱਖੀ ਜਨਾਵ ਰੱਖਦਾ ਸਿੱਖੀ ਦਾ ਸਾਰਿਆਂ ਦੀ ਹੋਈ ਹੈ ਕਬੀਰ ਦੇ ਵੀ ਸਿੱਖ ਨੇ ਫਰੀਦ ਦੇ ਵੀ ਸਿੱਖ ਨੇ ਸਿੱਖੀ ਕੋ ਗੁਰੂਆਂ ਦੀ ਗੱਲ ਐ ਜੀ ਹੈ ਸਿੱਖੀ ਪਰਮੇਸ਼ਰ ਦੀ ਹੈ ਸਿੱਖੀ ਦਾ ਗੁਰੂਆਂ ਨਾਲ ਕੋਈ ਸੰਬੰਧ ਨਹੀਂ